ਰਸਨਾ ਪਵਿੱਤਰ ਕਰੋ ਸਾਰੇ ਹੀ ਗੱਜ ਕੇ ਆਖੋ ਧੰ ਸ੍ਰੀ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਆਈ ਸੰਗਤ ਬਹੁਤ ਧੰਵਾਦ ਹੈ ਅੱਜ ਜਿਹੜੇ ਮੇਲਾ ਸੰਗਤ ਪ੍ਰਚੀ ਸਿਆਣ ਅਤੇ ਸਾਰੇ ਪ੍ਰਵਾਹਵਲੋਂ ਅਤੇ ਸੰਤ ਕੁਲਦੀਪ ਸਿੰਘ ਜਨਾਤਾ ਪ੍ਰਵਾਹਵਲੋਂ ਇਹ ਸੰਤ ਰਾਜਾ ਸਿੰਘ ਜੀ ਪੁਈ ਜਿਨ੍ਹਾਂ ਨੇ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਚੱਤਰ ਸਾਹਿਬ ਐਟ ਅਤੇ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਸਤਸਾਹ ਐਟ ਪੰਥ ਦੀ ਅੰਤਕ ਸੇਵਾ ਕੀਤੀ ਹੈ ਸੱਚਾ ਪਾਸ਼ਾ ਪਰ ਬਖਸ਼ਿਸ਼ੀ ਉਹਨਾਂ ਤੇ ਕਿ ਆਪਣੇ ਆਪ ਨੂੰ ਅਤੇ ਸਾਰੇ ਪਰਿਵਾਰ ਨੂੰ ਵੀ ਜੀ ਦਿੱਤੀ ਮਰਿਆਦਾ ਸੱਚਾ ਪਾਸ਼ਾ ਦੀ ਉੱਤੇ ਵੱਤ ਵੱਤ ਚੱਲਣ ਦਾ ਪ੍ਰੇਰਨਾ ਦਿੰਦੇ ਸੀ ਸਾਰੇ ਨੂੰ ਆਪ ਜੀ ਨੇ ਕੀਤਨ ਨੰਦ ਮਨਿਆ ਹੈ ਰਗੀ ਜੀ ਦਾ ਬਹੁਤ ਮਾਤ ਹੈ ਅਤੇ ਹੁਣ ਸਨ ਬੜਾ ਮਾਨ ਹੈ ਬੜੀ ਖੁਸ਼ੀ ਵੀ ਹੁੰਦੀ ਹੈ ਕਿ ਰਗੀ ਦੇਵਿੰਦਰ ਪ੍ਰਤਾਪ ਸਿੰਘ ਜੀ ਅਤੇ ਮਹਿੰਦਰ ਪ੍ਰਤਾਪ ਸਿੰਘ ਜੀ ਇਸ ਦਿਨ ਇਸ ਮੇਲੇ ਤੇ ਉਹਨਾਂ ਨੇ ਬੇਨਤੀ ਮੰਨ ਕੇ ਇੱਥੇ ਆ ਕੇ ਦਰਸ਼ਨ ਦਿੱਤੇ ਨੇ ਕਿ ਕਿ ਉਹਨਾਂ ਨੂੰ ਇਹ ਪਤਾ ਹੈ ਕਿ ਉਹਨਾਂ ਨੇ ਅਗਲੇ ਹਫਤੇ ਵਾਪਸ ਅਮਰੀਕਾ ਦਾ ਅਮਰੀਕਾ ਦਾ ਵਾਪਸ ਜਾਣਾ ਹੈ ਜਿਸ ਤਰ੍ਹਾਂ ਕਿ ਪਹਿਲਾਂ ਆਪਣੀ ਜਾਣਕਾਰੀ ਦਿੱਤੀ ਸੀਗੀ ਕਿ ਰਾਗੀਸਰਨ ਅਮਰੀਕਾ ਅ ਰਿਮਾਸਟ ਬਤਰਾਕਦੇ ਨੇ ਅਤੇ ਸੱਚ ਪਾਤਸ਼ਾਹੀ ਦੇ ਕਿਰਪਾ ਦੇ ਨਾਲ ਸੱਚ ਪਾਹ ਜੂਰੀ ਵਿੱਚ ਵੀ ਕਾਫੀ ਦਫਾ ਕੀਰਤਨ ਤੇ ਸੰਗੀਤ ਕਰਟਕ ਨੇ ਇੱਥੇ ਜਿਸ ਤਰ੍ਹਾਂ ਕਿ ਪਿਛਲੀ ਦਫਾ ਨੇ ਆਪ ਜੀ ਨੂੰ ਨਿਹਾਲ ਕੀਤਾ ਸੀ ਅੱਜ ਵੀ ਉਹਨਾਂ ਕੇ ਬੇਨਤੀ ਹੈ ਕਿ ਇਸ ਤੇ ਮੌਕੇ ਤੇ ਆਪ ਜੀ ਨੂੰ 1 ਘੰਟੇ ਲਈ ਕਿਰਪਾ ਕਰਨਗੇ ਸੋ ਬੇਨਤੀ ਹੈ ਰਜਿਸਟਰ ਨੰਬਰ ਕੇ ਸਟੇਸ਼ਨ